ਹੋਏ ਪਾਸਪਤੀ ਮਾਨੁਖੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇਕਾ ਭਗਵਾ ਮਾਨੁਖੀ ਟੇਕ ਬਿਰਤੀ ਸਭ ਜਾਣ ਉਹ ਲੁੱਖਾ ਆਦਮੀ ਹੋ ਇਹਦੇ ਟੇਕ ਹੈ ਅਰਦਾਸ ਕਰਦੇ ਗੁਰੂ ਅਰਦਾਸ ਦੀ ਏਕ ਰੱਖੀ ਬੈ ਉਹ ਆਦਮੀ ਤੇ ਗੁਰਬਾਣੀ ਕਹਿੰਦੀ ਆ ਕੀ ਟੇਕ ਬਰਸੀ ਸਮਝਾਂ ਦੇਵਨ ਕੋਈ ਕੇ ਭਗਵਾਨ ਦੇਵਨ ਕੋਈ ਦੇਖੋ ਇਹ ਜਿਹੜਾ ਪ੍ਰਚਾਰ ਅੱਜ ਹੋ ਰਿਹਾ ਹੈ ਗੁਰਬਾਣੀ ਦਾ ਕਿਹੜੇ ਹਿਸਾਬ ਨਾਲ ਹੋ ਰਿਹਾ ਆਖਰੀ ਪੰਕਤੀ ਲਿਖਿਆ ਪਿੱਛਲੇ ਅਸਟੋ ਬੋ ਕਿਰਪਾ ਕਰੇ ਤੈ ਆਪਣਾ ਨਾਮ ਦੇ ਆਪਣਾ ਨਾਮ ਦੇ ਨਾਮ ਵੀ ਦਿੰਦਾ ਉਹ ਨਾਮ ਵੀ ਦਿੰਦਾ ਸੰਸਾਰੀ ਬਾਜ਼ਾਰਤ ਵੀ ਉਹੀ ਦਿੰਦਾ ਜਨੇ ਵੀ ਖਜ਼ਾਨੇ ਨੇ ਸਭ ਨਦਾਨ ਨਾਮ ਰੱਖਿਆ ਨਾ ਇਹ ਸੰਸਾਰੀ ਬਿਨਾਂ ਸਭ ਨਦਾਨ 10 ਅਸਟ 18 ਜਤੀਨਾ ਠਾਕੁਰ ਕਰਤਲ ਧਰਿਆ ਉਹਦੇ ਹੁਕਮ ਦੇ ਵਿੱਚ ਨੇ ਕਰਤਲ ਹੱਥੀ ਬੈਣ ਦੇ ਹਾਥੋਂ ਦਾ ਹੁਕਮ ਹੈ ਕਰਦੇ ਥਲੇ ਨੇ ਉਹਦੇ ਹੁਕਮ ਦੇ ਅਡੋਰ ਨੇ ਜੇ ਨਾਨਕ ਬਲਵੰਤ ਸਦਵੰਦ ਆਇਆ ਤੇਰਾ ਕਰ ਬਲਵੰਤ ਦੇਵਨ ਕੋ ਇਕ ਹੈ ਭਗਵਾਨ ਦੇਵਨ ਕੋ ਇਕ ਹੈ ਭਗਵਾਨ ਨਹੀਂ ਕੋਈ ਭਗਵਾਨ ਇਕਾ ਜਿਹੜਾ ਸੱਚਾ ਛਾਣ ਦੇ ਵਿੱਚ ਉਹ ਭਗਵਾਨ ਦੇ ਰੂਪੇ ਹੀ ਹੈ ਭਗਵਾਨ ਨੇ ਬਤਾਇਆ ਪਰਮੇਸ਼ਰ ਨਹੀਂ ਆਇਆ ਲਾਫ ਆਪਣੇ ਹੁਕਮ ਵਾਲੇ ਭਗਵਾਨ ਦੱਸਦਾ ਇਹ ਜੋਤ ਹੈ ਦੇਖੋ ਜੋਤ ਪ੍ਰਦਾਨ ਹੈ ਫਿਰ ਵੀ ਹੁਕਮ ਰਗੋਦੀ ਪ੍ਰਦਾਨਗੀ ਹੈ ਜੋਤ ਪ੍ਰਦਾਨ ਹਾਕਮ ਤੇ ਹੁਕਮ ਦੀ ਪ੍ਰਦਾਨਗੀ ਹੈ ਹਾਕਮ ਦੇ ਹੁਕਮ ਦੀ ਪ੍ਰਦਾਨਗੀ ਹੈ ਤਾਂ ਹਾਕਮ ਹਾਕਮ ਦੀ ਹੁਕਮ ਦੀ ਪ੍ਰਦਾਨਗੀ ਹੈ ਉਹ ਕਿਹਨੂੰ ਪ੍ਰਦਾਨਗੀ ਹੈ ਕਿ ਹਾਕਮ ਤੇ ਹੁਕਮ ਦੀ ਪ੍ਰਦਾਨਗੀ ਹੈ ਤਾਂ ਹਾਕਮ ਦੇ ਬਿਨਾ ਕੁਝ ਨਹੀਂ ਹਾਕਮ ਹੁਕਮ ਤੇ ਬਿਨਾ ਕੁਝ ਹੈਗਾ वो हाकम कंप्यूटर में ना घुसे वो कोना वापस भी लिया जा सकता है hmm. वो भी जा सकता थे। भी है बगल में रहते असल में भी जो hmm. है वही सुप्रीम पावर सुप्रीम पावर है संविधान भी पार्लियामेंट है ताकत नहीं किसों बैठे इकट्ठे सारे कि कम ਇਕ ਤਰਾਜ਼ ਇਕ ਰੂਪ ਇਕ ਰੰਦ ਉਸ ਪ੍ਰੀਤ ਨੂੰ ਹੁਕਮ ਉਹ ਮਰਜੀ ਹੈ ਜੋ ਮਰਜੀ ਕਰੀ ਜਾਂ ਲੋਕਾਂ ਨੂੰ ਮਰਜੀ ਹੀ ਆਉਂਦੀ ਹੈ ਕਿਤੇ ਮਰਜੀਆ ਕੋਈ ਅਸੂਲ ਨਹੀਂ ਹੁੰਦਾ ਕਿਤੇ ਮਰਜੀਆ ਤਾਂ ਕੋਈ ਨਿਯਮ ਨਹੀਂ ਹੁੰਦਾ ਕਿਤੇ ਮਰਜੀਆ ਤਾਂ ਕੋਈ ਮਰਿਆਦਾ ਨਹੀਂ ਹੁੰਦੀ ਉਹ ਤਾਂ ਰਹਿਤ ਹੁੰਦੀ ਹੈ ਮਰਜੀ ਵਿੱਚ ਜੋ ਹੁਕਮ ਆਉਂਦਾ ਉਸ ਤੇ ਵੜਾ ਉਹ ਤੇ ਰਹੇਗਾ ਮੰਨਣਾ ਕੋ ਹੁਕਮ ਉਹ ਰਹਦਾ ਉਦੋਂ ਲੇ ਜੇ ਭਾਵੇਂ ਜੂੜ ਜੂੜ ਭਾਵੇਂ ਤਾਂ ਰਹੇਗਾ ਕੋੜੀ ਕਰੋੜੀ ਕਿੱਤਰਾਣ ਉਹ ਤੇ ਰਹੇਗਾ जिसके ਜਿਸਕੇ ਦੀਏ ਰਹੇ ਅਗਾਏ ਬਹੁਰਨ ਕ੍ਰਿਸ਼ਨਾ ਲਗਿਆ ਜਿਸਕੇ ਦੀਏ ਰਹੇਗਾ ਹੈ। ਉਹ ਦਾਤਾ ਉਹ ਕਰੇ ਜਿੱਦਾਂ ਦਿੱਤੇ ਅਨੰਦ ਹੋ ਜਾਵੇ। ਕੁਝ ਭੁੱਖੇ ਨਾਲੇ ਉਹ ਕਹਦਾ ਦਾਤਾ। ਜਿੱਤੇ ਕਹਿੰਦੇ ਆ ਜੇ ਜ਼ਿਆਦਾ ਮਗਲਰ ਦਿੱਤਾ ਠੀਕ ਸੀ। ਪਰ ਤਾਂ ਨਹੀਂ ਆਦਾ ਮਗਿਆ ਕਿਤੇ ਇਦੋਂ ਮਨ ਮਿਲੇ। ਦਾਤਾ ਉਹਨਾਂ ਮੰਗੀਆਂ ਫਿਰ ਦੇ ਦੇ ਦਾਤਾ ਉਹ ਜੇ ਹੋਰ ਮਗਲਰ ਦੇ ਚਾਹੇ ਹੋਰ ਦਿੱਤੇ ਦੱਸ। ਰਹਿਮਤ ਥੇਰੋ ਕਨਾਂ ਬੀਜੇ ਜੀ ਬਧਾਏ ਬਣਾ ਦਿੰਦਾ ਜੀ ਜ਼ਹਲਾਲ ਜੀ ਬਹੁਤ ਹੈ ਅ ਥੋੜਾ ਦਿੰਦਾ ਠੀਕ ਹੈ ਜਨਕ ਦੇਸ ਤਾਂ ਫਿਰ ਐਂ ਵੀ ਕਹਿੰਦਾ ਦਾ ਬੀਜ ਇਹ ਤਾਂ ਆਦਮੀ ਦਾ ਤਾਂ ਇਹਦੇ ਦਿੱਤੇ ਦਾ ਰਾਜ ਨਹੀਂ ਹੋ ਸਕਦਾ ਜਿਸਕੇ ਦੇ ਸਕਦਾ ਮਾਇਆ ਨਾ ਰਾਜ ਰਾਜ ਇਹ ਉਹ ਮਾਰਦੀ ਗੱਲ ਤਾਂ ਹੈ ਰਦ ਸਿੱਧੇ ਗੱਲ ਹੈ ਕਿ ਉਹ ਗੌਰ ਨਾਲ ਤ੍ਰਿਸ਼ਨਾ ਲੱਗਿਆ ਆਏ ਆਈ ਆ ਕੇ ਵਿਸੂਤ ਕਰਦੇ ਤਾਂ ਗੱਲਦਾ ਉਹਦਾ ਸੱਥੋ ਕੇ ਬਗੜੀ ਉਹ ਨਹੀਂ ਕਿ ਆਸ ਹੀ ਕੋਈ ਹੋਰ ਸਮਝਦਾ ਕੋਈ ਕੱਲ ਨਾਮ ਦੀ ਜਲੀ ਐ ਪਿਛੋਂ ਚੱਕੀ ਐ ਜੀਏ ਨਾਮ ਦੀ ਗੱਲ ਹੈ ਇਸ ਆਪਾਂ ਵਿਚਾਰ ਅਰਥ ਵਿਚਾਰ ਚਰਚਾ ਡੁੱਬੀ ਮੰਗਦੇ ਨਾ ਕਹਦਾ ਕਿ ਇਹ ਦੋ ਹੈ ਤਾਂ ਆਪ ਵੀ ਦੋਸਰ ਖਿੱਚ ਕੇ ਉਧਰ ਆਪਣੇ ਵੱਲ ਉਹਨਾਂ ਦੀ ਮਤਲਬ ਹੈ ਕੁਖ ਰਹੀ ਨਾ ਜੇ ਕੋ ਕਰ ਰਹੇ ਨਾ ਤੇ ਸਤਾ ਫੇਰ ਕਹੂਗਾ ਮੈਂ ਬੋਲੇ ਸੰਭੂ ਜਾਣਦਾ ਤੇ ਸਾ ਬੇਚੀ ਜਾਏਗਾ ਜਾਂ ਤਾਂ ਆਇ ਰਹੂਗਾ ਫੇਰੇ ਕਹੂਗਾ ਦੁਬਾਰਾ ਆਦਾਸ ਨਹੀਂ ਕਰਦਾ ਪਰ ਬਹੁਤ ਤ੍ਰਿਸ਼ਨਾ ਲੱਗਿਆ ਤ੍ਰਿਸ਼ਨਾ ਲੱਗਿਆ ਕਾ ਤ੍ਰਿਸ਼ਨਾ ਹੀ ਲੱਗਿਆ ਉਦੀ ਬੰਗੇ ਦਸੋ ਕੀ ਬੰਗੇ ਜਾਓ ਜੀ ਤੇ ਤ੍ਰਿਸ਼ਨਾ ਖੜਾ ਨਹੀਂ ਛੱਡਦੀ ਇਹ ਚਾਰ ਦਰਵਾਜੇ 30 ਵਾਸਤੇ ਰੱਖੇ ਸੀ ਇਹ ਕਿਹੜਾ ਗਲਤ ਹੈ ਸਨ ਚਾਰ ਦਰਵਾਜੇ ਰੱਖੇ ਤੇ 30 ਚਾਰ ਦਰਵਾਜੇ ਦਰਵਾਜਾ ਰੱਖਦੇ ਸਾਰੇ ਬਦਨਾਂ ਜੀ ਕੋ ਹੁੰਦਾ ਦਰਵਾਜਾ ਜੇ ਬੁੱਧਦਰ ਸੀ ਪਰ ਬੁੱਧਰ ਘਾਣੋ ਵੜਾਇਆ ਸੀ ਤਾਂ ਉਹਨਾਂ ਨੇ ਆਪਣੇ ਬੈਠਣ ਨੂੰ ਕਪੜਾ ਬਣਾਇਆ ਸੀ ਪੜ੍ਹਨ ਟੂ ਸਟੱਡੀ ਕਰਨ ਨੂੰ ਜਾਂ ਇਥੇ ਜਿਹੜੇ ਥੋੜੇ ਬਹੁਤੇ ਨਾਲ ਸਿੱਖ ਹੁੰਦੇ ਤੇ ਉਹਨਾਂ ਨਾਲ ਉਪਦੇਸ਼ ਕਰਨ ਨੂੰ ਬਣਾਇਆ ਸੀ ਕਿਤੇ ਉੱਤੇ ਹਜ਼ਾਰਾਂ ਰੁਪਏ ਸੀ ਜੇ ਉਹਦਾ ਉਹਦਾ ਵਾਰ ਕਰ ਸਕਦੇ ਸੀ ਕਿਤੇ ਸਦਾ ਬਾਤਾਂ ਨਹੀਂ ਕਰਦੀ ਸੀ ਸੰਗਰਸ਼ਾਂ ਨੂੰ ਜੋ ਬਣਾ ਸੇ ਬਣਾਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਸੇਫਟੀ ਦਾਸ ਚਾਰੇ ਪਾਸੇ ਤੇ ਹਵਾ ਆਉਣੀ ਚਾਹੀਦੀ ਹੈ ਕਿਹੜਾ ਉੱਥੇ ਬਿਜਲੀ ਦੀ ਭੱਖਰੇ ਤੇ ਆਪ ਪਹਿਣਾ ਹੋਵੇ ਆਪ ਪੈਂਦੇ ਰਹੇ ਰਹੋ ਪਰ ਖਵਾਲੀ ਦੇ ਗੁਰੂ ਸਾਹਿਬ ਅੱਜ ਕੱਲ ਗਰਮੀ ਦੇ ਮਹੀਨੇ ਇਹ ਹਵਾ ਉਹ ਆਹ ਪਾਣੀ ਥਾਈ ਜੇ ਕੋਈ ਦੀ ਆਵਾਜ਼ ਆਵੇ ਦਰਵਾਜ਼ੇ ਖੁੱਲੇ ਸਕਦਾ ਤੇ ਕਿਹੜਾ ਕੁੱਤਾ ਆ ਸਕਦਾ ਫਿਰ ਆਹ ਨਾਲੇ ਪਾਣੀ ਨਾ ਕੁਝ ਨਹੀਂ ਵੜਾ ਸਕਦਾ ਇਹ ਤਾਂ ਉਸ ਬੇੜੀ ਦੀ ਲੋੜ ਸੀ ਤ੍ਰਿਸ਼ਨਾ ਕਿਵੇਂ ਆ ਬੜੀ ਸਵਾਸਦਾ ਹੈ ਉਹ ਤਾਂ ਨਵੇਂ ਬਾਹਰ ਨਾਲ ਤ੍ਰਿਸ਼ਨਾ ਲੱਗਿਆ ਹੈ ਤੇ ਇਹ ਤਾਂ ਉੱਥੇ ਹੀ ਬੜੀ ਵੱਢੀ ਹੈ ਜਿਸਕੇ ਧੀਏ ਜੇ ਕੋਈ ਦੇ ਦਿੰਦਾ ਉੱਥੇ ਕਿਰਪਾ ਹੁੰਦੀ ਫੇਰ ਤ੍ਰਿਸ਼ਨਾ ਦੀ ਉੱਥੇ ਦੇਸੀ ਵੱਢੀ ਪਰ ਉੱਥੇ ਦਾ ਉਹਦਾ ਹੈੱਡਕੁਆਰਟਰ ਇਹਨਾਂ ਦਾ ਇਹਨਾਂ ਦਾ ਕੁਝ ਜੰਗਦੋ ਤਾਂ ਸਾਰੇ ਹੀ ਦੋਹਾਂ ਦਾ ਹੈੱਡਕੁਆਰਟਰ ਆ ਉਹ ਜਿਹੜੇ ਵਿਰੋਧੀ ਨੇ ਸੱਚਦੇ ਉਹਨਾਂ ਦਾ ਹੈੱਡਕੁਆਰਟਰ ਹੈ ਉੱਥੇ ਤਾਂ ਰਹਿਣਾ ਹੀ ਸੀ ਸੰਤ ਕੇ ਜੋ ਹੁਣ ਵੀ ਚੱਲਦੀ ਹੈ ਸਾਹਸਕਲ ਨਹੀਂ ਚੱਲਦੀ ਸਾਬਤ ਤਾਂ ਹੋਈ ਜਾਂਦਾ ਵੀ ਨੁਦਗਰੇ ਜਸਤਦੇ ਖੁਦ ਦੇ ਕਹਿ ਜਾਂਦੇ ਕਹਿ ਜਾਂਦੇ ਹਜ਼ੂਰਤ ਉਹ ਤਾਂ ਨਹੀਂ ਕੋਈ ਨਹੀਂ ਮਾਰੇ ਰਾਖਾ ਇੱਕੋ ਆਪ ਮਾਨਕ ਆਪ ਮਾਰੇ ਰਾਖੇ ਇੱਕੋ ਆਪ ਉਹ ਕੌਣ ਹੈ ਜਿਸਕੇ ਦिए ਰਹੇ ਰਾਖੇ ਮਾਰੇ ਰਾਖੇ ਇੱਕੋ ਆਪ ਜਿਹਦੇ ਜਿਹੜਾ ਮਾਰਨਾ ਰੱਖਣ ਦੇ ਵਿੱਚ ਕੋਈ ਸਮਰੱਥਾ ਹੈ ਉਹ ਬੂਲ ਗੁਰੂਬ ਕੋਲ ਪ੍ਰਭਦਾ ਉਹ ਕਬ ਉਹ ਹੀ ਹੋਈਆ ਸੱਚਖੰਡ ਦੇ ਪਾਰਲੀਮੈਂਟ ਜਿਹੜੀ ਆ ਜਿਹੜੀ ਮਾਲਕਾ ਉਹਦੇ ਤੇ ਰੱਖੇ ਸਾਰੇ ਇਹਦੇ ਹੁਕਮ ਤੇ ਉੱਤਰੋਸਾ ਉਹਦੇ ਵੱਲ ਚੱਕੇ ਉੱਥੋਂ ਨਾਮ ਮਿਲਦਾ ਉਹ ਗੁਰੂ ਭੁਜੇ ਪਾਕਿਸਤਾਨ ਸਾਡਾ ਤਾਂ ਮਿਲਦਾ ਹੀ ਰਹਿੰਦਾ ਬਾਕੀ ਤੇਰਾ ਜਿਹੜਾ ਫਿਕਰ ਆ ਉਹ ਵੀ ਤੇਰੇ ਨਾਲੋਂ ਜ਼ਿਆਦਾ ਹੈ ਪੈਦਾ ਕੀਤਾ ਉਹਨਾਂ ਪਹਿਲਾਂ ਸਭ ਦਾ ਸਭ ਕੁਝ ਪਾਇਆ ਹੋਇਆ ਇੱਥੇ ਜੋ ਕੁਝ ਪਾਇਆ ਹੋਇਆ ਕਬਰ ਸਾਰੇ ਤਾਂ ਇੱਕ ਵਾਰੀ ਸਭ ਜਾਣ ਬਾਹਰੋਂ ਕੀ ਇੱਕ ਵਾਰੀ ਸਭ ਜਾਣ ਆਦਮੀ ਤਾਂ ਦੇਖ ਨਹੀਂ ਰੱਖੀ ਜਾ ਸਕਦੀ ਆਦਮੀ ਤਾਂ ਆਪ ਕਿਸੇ ਨਾ ਕਿਸੇ ਦੇ ਟੇਕ ਰੱਖਦਾ ਹਾਂ ਜਿਸਕੇ ਦੀਏ ਰਹਿ ਗਾਏ ਬਹੁਤ ਲਾਗੇ ਰਾਖੇ ਕੋ ਆ ਰਾਖੇ ਕੋ ਆ ਇਹ ਉਹ ਆਦਮੀ ਦੀ ਪ੍ਰੋਪਰਟੀ ਹੈ ਜੀ ਟੇਕ ਰੱਖਣੀ ਹੈ ਆਦਮੀ ਦੀ ਬਜਾਈ ਜੀ ਤੇ ਟੇਕ ਰੱਖਣੀ ਆ ਉਹਦੀ ਗੱਲ ਜਿਹੜਾ ਮਾਰੇ ਆ ਲਾਕੇ ਇੱਕ ਉਹ ਹਾਂ ਇਹ ਤਾਂ ਮਸਲਾ ਹੁਕਮ ਹੈ ਦੇਖੋ ਇਹ ਆ ਇਹਨੂੰ ਕਹਿੰਦੇ ਸ਼ਬਦ ਇਹ ਸੇ ਨੂੰ ਸ਼ਬਦ ਕਹਿੰਦੇ ਸ਼ਬਦ ਗੁਰੂ ਇੱਕ ਮਿੰਟ ਇਤਨਾ ਗੱਲਾਂ ਨੇ ਕਨਸੈਪਟ ਵਸੇ ਪਰ ਕੀ ਸ਼ਬਦ ਦਾ ਇਹਦਾ ਜਿਹਦਾਰ ਥਾਲ ਜ਼ਿਆਦਾ ਪੂਜਾ ਕਰਨੀ ਪੂਜਾ ਕਰਨੀ ਅਕਾਲ ਕੌਣ ਹੈ ਅਕਾਲ ਹੈ ਪੂਰਨ ਸਰਬ ਆਪਣਾ ਪੂਰਨ ਅਕਾਲ ਹੈ ਉਹ ਦਾ ਜੋਤ ਹੈ ਨਾ ਇਹ ਸਾਲੇ ਦੀ ਪੂਜਾ ਤੋਂ ਹੀ ਗੱਲ ਲਿਓ ਉਹਦੇ ਅੱਗੇ ਸਭ ਕੁਝ ਤਨ ਮਨ ਤਨ ਸੋਪਣੇ ਅਕਾਲ ਦੇ ਤਨ ਮਨ ਤਾਂ ਸਭ ਸੋਮ ਗੁਰ ਕੋ ਜੇ ਗੁਰਬਾਨੀ ਦੇ ਅੱਗੇ ਅਸੀਂ ਸੋਪਿਆ ਤਾਂ ਇਹ ਪੂਰ ਬ੍ਰਹਮ ਦੇ ਸਤਿਗੁਰ ਦੇ ਨੂੰ ਇਸਮਰਨ ਕਰਦੇ ਹੋਏ ਅਸੀਂ ਗੁਰਬਾਨੀ ਦੇ ਜਿਹੜੀ ਗੁਰਬਾਨੀ ਜੋ ਹੈ ਇਹ ਪੂਰ ਬ੍ਰਹਮ ਦੀ ਜੋ ਹੈ ਉਹ ਹੀ ਵਿਚਾਰਦਾ ਬ੍ਰਹਮ ਸਾਰਾ ਪੂਰ ਬ੍ਰਹਮ ਹੀ ਹੈ ਪਰਮੇਸ਼ਰ ਕਿਸੇ ਕੋਲ ਬ੍ਰਹਮ ਨਹੀਂ ਤਾਂ ਇੱਕ ਕੋ ਹੋਏ ਤੇ ਇਹ ਉਚਰੀ ਬਾਣੀ ਚਾਹ ਨਾਟਕ ਨੇ ਉਚਰੀ ਚਾਹ ਤੋਗੀ ਉਚਰੀ ਨੇ ਪੂਰਾ ਤੇ ਹਾਂ ਉਹ ਤੇ ਪੂਰੇ ਗੁਰਦਵਾਰਾ ਨੂੰ ਬਰੇਜ ਕੇ ਪੂਰਾ ਹੋਰ ਕੋਈ ਗੱਲ ਹੋ ਗਿਆ ਪੂਰੇ ਗੁਰਦਵਾਰਾ ਤੇ ਇਹ ਕੋਈ ਆ ਬੋਲਣਾ ਕੋਈ ਹੋਵੇ ਇੱਥੇ ਵੀ ਇਹ ਕਹਿੰਦਾ ਉਹ ਬਾਹ ਵੀ ਕਰੇ ਐਂ ਦੱਸਿਆ ਕਿ ਜਿਵੇਂ ਇੱਥੇ ਇੱਕ ਨੇ ਇਹ ਰਈ ਸਰਬੰਦੀ ਇਹ ਕਾਹਦੀ ਸਰਬੰਦੀ ਆ ਜੀ ਮਾਨੁਸ ਕੇ ਚ ਨਹੀਂ ਹਾਥ ਨਾਨਕ ਕਹਿ ਕੁਛ ਨਹੀਂ ਹਾਥ ਨਾਨਕ ਦੇ ਤਾਂ ਹੱਥ ਚ ਕੁਛ ਨਹੀਂ ਮਾਨੁਸ ਕਹਿ ਕੇ ਚ ਨਹੀਂ ਹਾਥ ਮਾਨੁ ਕਦੇ ਆਤਮਿਕ ਤਾਂ ਕੁਛ ਹੈ ਨਹੀਂ ਤੇ ਨਾਨਕ ਮਾਨੁਖਾ ਉਹਦੇ ਹੱਥ ਚ ਕਰ ਕੀ ਹੋ ਗਿਆ ਬੰਦੇ ਬਰੁਖਾ ਸ੍ਰੀ ਤੇ ਨਾਨਕ ਆ ਆਪੇ ਬਰੁਖਾ ਸ੍ਰੀ ਦੇ ਵਿੱਚ ਨੇ ਇਹ ਹੀ ਤਾਂ ਕਹਿ ਰਹੇ ਨੇ ਵੀ ਬਰੁਖਾ ਦੇ ਉੱਤੇ ਨਾ ਤੁਸੀਂ ਕਰੋ ਮਨੁੱਖ ਜਾਣ ਕੇ ਕਹਿਣਗੇ ਅਸੀਂ ਕੁਰਬਾਨੀ ਨੂੰ ਬੰਦੀਆਂ ਨੂੰ ਬੰਦੀਏ ਜਿਹੜਾ ਇਹ ਕੁਝ ਕਹਿਦਾ ਇਹ ਕਹਿੰਦੇ ਉਹਦੇ ਵਾਸਤੇ ਸਾਡੇ ਕੋਲ ਛੇਤਾ ਰ ਹੈ ਸਾਡੇ ਕੋਲ ਛੇਤਾ ਰ ਹੈ ਉਹਦੇ ਵਾਸਤੇ ਵੇਦੀ ਨੂੰ ਕਰ ਸਕਦਾ ਜਾਂ ਗੁਰਬਾਣੀ ਦੀ ਵੇਦੀ ਉਹਦਾ ਕੌਣ ਹੈ ਕਹਾਂ ਦਾ ਗੁਰਬਾਣੀ ਨੂੰ ਕਾਹਦੇ ਕਹਿਣੋਂ ਆਇਆ ਕਦੀ ਤੂੰ ਜੋ ਪਰਜੀ ਵੇਜ ਉਹਦੀ ਲਾਜ ਨਹੀਂ ਸਾਡੇ ਕੋਲ ਜਿਸ ਦਾ ਹੁਕਮ ਬੁੱਝੂ ਜ ਸੁਖ ਹੋਏ ਜਿਸ ਦਾ ਹੁਕਮ ਬੁੱਝ ਸੁਖ ਹੋਏ ਉਹਦਾ ਹੁਕਮ ਬੁੱਝੇ ਤੇ ਬੁੱਝੇ ਹੋਣ ਅਹ ਹੁਕਮ ਹੈ ਨਾਮ ਰਕਟੰਠ ਕਰੋ ਜਿਸ ਉਹਦਾ ਹੁਕਮ ਨੂੰ ਘੰਟੇ ਚ ਕੇ ਰੱਖ ਜੋ ਹੁਕਮ ਜਿਹੜਾ ਹੁਕਮ ਆਉਂਦਾ ਉਹ ਬੋਲ ਜੋ ਬੁਲਾਉਂਦਾ ਉਹ ਬੋਲ ਫਰਕ ਫਰੋ ਜੋ ਬੁਲਾਉਂਦਾ ਉਹ ਮੈ ਕੋਲ ਹੰ ਸਿਮਰ ਸਿਮਰ ਸਿਮਰ ਪ੍ਰਭ ਸੋਏ ਇਸ ਕਰਕੇ ਸਿਮਰ ਸਿਮਰ ਸਿਮਰ ਪ੍ਰਭ ਸੋਏ ਪ੍ਰਭ ਦੀ ਜਿਹੜੀ ਸੋਭਾ ਸੋਏ ਦਾ ਅਰਥ ਤੇ ਸੋਭਾ ਲੱਗਦਾ ਪ੍ਰਭ ਦੀ ਜਿਹੜੀ ਸੋਏ ਹੈ ਸੋਭਾ ਇਹ ਸਿਮਰਨ ਕਰ ਇਹ ਜੀ ਸੋਭਾ ਹੋ ਤੇਰੀ ਵੀ ਏ ਮਿੱਠੀ ਗੋਲੀ ਆ ਪ੍ਰਭ ਦੀ ਜਿਹੜੀ ਸੋਭਾ ਕਿ ਐਹੀ ਜੀ ਸੋਭਾ ਚਾਉਣਾ ਸੇਮੁਰੂ ਸੇਮੁਰੂ ਸੇਮੁਰੂ ਪ੍ਰਭ ਰੋਏ ਆ ਸੋਭਾ ਨੂੰ ਸਮਝ ਲੈ ਮਾਨਕੋ ਵਿਗੰਨ ਲੱਗੇ ਕੋਈ ਮਾਨਕਾ ਨਾ ਫਿਰ ਵਿਗਨ ਨਹੀਂ ਕੋਈ ਤੇਨ ਬਿਲਕੁਲ ਰਾਜ ਬਗੜੀ ਬਣਾ ਜਾਂਗਲ ਟੁੱਟਦੀ ਗੱਡੀ ਕਿਤੇ ਨਹੀਂ ਰਾਜ ਕਿਤੇ ਸਟਾਪੇਜ ਝੋਣ ਚੋਬ ਦੇਸ਼ਿਤ ਨਹੀਂ ਕਾਹ ਨੂੰ ਨਹੀਂ ਹੈ ਸਿਮਰਜ ਕਾਹ ਨੂੰ ਆਇਆ ਥੋੜਾ ਜਿਹਾ ਕਾਹ ਨੂੰ ਵਿਦੇਸ਼ ਆਇਆ ਜਿਹਨਾਂ ਨੂੰ ਕਿਹਾ ਵੀ ਧਿਆਕ ਰੱਖਣੀ ਉਹ ਬੋਸ ਕਰਨੇ ਸੁੱਟ ਜਾਣ ਬੈਠੇ ਤੇ ਉਹਨਾਂ ਨੂੰ ਕਿਹਾ ਰੋਕ ਕੇ ਆਪ ਇੱਕ ਨੂੰ ਬੁਲਾਇਆ ਨਾ ਇੱਕ ਨੂੰ ਸੰਬੋਧਨ ਕਰਕੇ ਕੀਤਾ ਇਹਨਾ ਨਹੀਂ ਸਾਰਿਆਂ ਨੂੰ ਲਈ ਕੀਤਾ ਸਿਮਰਜ ਨੇੜਾ ਸੀ ਉਹਨੂੰ ਸੰਬੋਧਨ ਕੀਤਾ ਹੋਇਆ ਪੰਜਵੇਂ ਪਾਸੇ ਨੇ ਜੇਨ ਪਾਸੇ ਨੂੰ ਕੀਤਾ ਸੋ ਇਹ ਚਿੰਗੋਤ ਹੁੰਦਾ ਉਹਦੀ ਵਸਤਾ ਸੀ ਉਹ ਜਿਹਦੀ ਵਸਤਾ ਸੀ ਉਸ ਦੀ ਵਸਤਾ ਦੀ ਗੱਲ ਹੈ ਉਹ ਸੰਗਤ ਵਿੱਚ ਹੋਣੇ ਨੇ ਬੈਠੇ ਹਾਂ ਆਹ ਲੱਗਦਾ ਨਹੀਂ ਕਿ ਤੁਹਾਨੂੰ ਕਹੀ ਹੋਈ ਹੈ ਗੱਲ ਲੱਗਦੀ ਸਬਰ ਸਬਰ ਸਬਰ ਪਰ ਮਾਨਕ ਬਿਕਨ ਨਾ ਕੇ ਕੋਈ ਮਾਨਕ ਬਗੈਰ ਮੈਂ ਤੁਹਾਨੂੰ ਕੋ ਬਗੈਰ ਨਾ ਸਦਾ ਜਾਂਦਾ ਉਹ ਤਾਂ ਉਹਨੂੰ ਕਹਿ ਕੇ ਗੱਲ ਜੀ ਬੈਠਾ ਸੀ ਵਿੱਚ ਬਹੁਤ ਕੋਈਆ ਗੁਰਬਾਨੀ ਜਿਹੜੇ ਤੇ ਆਂਦੇ ਜੀ ਬਹੁਤ ਕੋਈਆ ਉਹਨਾਂ ਨੂੰ ਪਤਾ ਸੀ ਇਹਨਾਂ ਰੋਣਾ ਪਿੱਛੇ ਆ ਬਾੜੀ ਰਜੀ ਜੇ ਮਹਾਰਾਜ ਦੇ ਜੇ ਮਹਾਰਾਜ ਅੱਜ ਹੀ ਗੁਰਾਈ ਤੇ ਹੋ ਜਾਣੀ ਹੈ ਤਾਂ ਸਭ ਕੋਈ ਗੁਰਬਾਨੀ ਕੇ ਸਾਥ ਹੋਣਾ ਤਾਂ ਜੋ ਵੀ ਗੁਰਬਾਨੀ ਲਿਖੀ ਹੈ ਸੋ ਬੋਲੇ ਜੋ ਪਿਖੇ ਅਕੀਂ ਦੇਖਣੀ ਹੈ ਦੇਖਣੀ ਹੈ ਜੇ ਅਸੀਂ ਸਭ ਕੁਝ ਦੇਖ ਲਿਆ ਹੋ ਫੇਟਾ ਸਾਰਾ ਇਹ ਜੂਗਾ ਜਹਾਰ ਪੈਸਾ ਰਕਸ਼ਾ ਜੋਗੀ ਹੈ ਜੇ ਨਾਲ ਦੇਖਣ ਦੇ ਨਾਲ ਜੋ ਰਕਸ਼ਾ ਰਹੇ ਜੂ